शलोक मोहल्ला पांचवा रहंदे खुंदे निंदक मारियन कर आपे आहार संत सहाय नानका वरते सब जाहर मारियन चले रहंदे तो के आ जांदे ने रहंदे खुद ही होंदे हो ने ਸੱਤ ਦੇ ਬਾਹਰ ਉਹਨੇ ਦੀਆਂ ਗੱਲਾਂ ਵੀ ਆਉਂਦੀਆਂ ਨੇ। ਸੱਤ ਰੋਜ਼ ਰੋਜ਼ ਬਾਹਰ ਫਾਇਦੀ ਆ। ਜੇ ਤੁਸੀਂ ਕਹਿੰਦੇ ਰੋਜ਼ ਪ੍ਰਚਾਰ ਹੁੰਦਾ। ਠੀਕ ਹੈ। ਮਰੋੜ ਕੇ ਗੱਲਾਂ ਕਰਦੇ ਨੇ ਗੁਰਬਾਣੀ ਦੀਆਂ ਰੱਦ ਕਰਦੇ ਦੇ ਖਲਾਫ ਪ੍ਰਚਾਰ ਹੁੰਦਾ ਹੈ। ਕਰਕੇ ਸਤਿ ਸਾਈ ਜਹਰੋ ਕੇ ਵਰਤ ਰਿਆ ਸੱਚੇ ਜਹਰੋ ਕੇ ਵਰਤ ਰਿਆ ਸੱਦਾ ਦੀ ਸਾਈ ਚਾਈ ਚਨ ਮਾਰਾ ਸਤ ਸੱਚ ਜਹਰੋ ਕੇ ਵਰਤ ਰਿਆ ਪ੍ਰਗਟ ਹੋ ਕੇ ਵਰਤ ਰਿਆ ਇਸਦੀਓ ਦਰਪੈ ਹੋ ਪਰਕੇ ਦੀ ਵਰਤ ਰਿਆ ਸਤਿਆਰਿਆਂ ਦੇ ਹੱਦ ਦੀ ਗੱਲ ਹੋ ਰਹੀ ਆ ਗੂੜਿਆਂ ਦੇ ਖਰਾਬ ਗੱਲ ਹੋ ਰਹੀ ਇਹਦਾ ਕੀ ਭਾਵ ਇਹ ਕਿੱਥੇ ਹੋ ਰਹੀ ਹੈ ਗੱਲ ਕਿਸ ਤਰ੍ਹਾਂ ਇਹਨੂੰ ਆਪਾਂ ਸਮਝਾਂਗੇ ਵੀ ਰਹਿੰਦੇ ਖੁੰਦੇ ਨਿੰਦਕ ਮਾਰੀਆਂ ਨੇ ਦਰਗਾਹ ਦੀ ਗੱਲ ਜੋ ਹੋ ਰਹੀ ਹੈ ਪੁਆਇੰਟ ਜਿਹੜਾ ਦੁਵੈ ਤੈਨੂੰ ਵੀ ਚਲਾਕੀ ਉਹ ਮੈਂ ਤੈਨੂੰ ਬੇਹੜਾ ਫੇਰ ਗਿਆ ਜਿਹੜੀ ਕਰਦੇ ਤੇ ਦੁਨੀਆ ਤਾਂ ਦੁਨੀਆ ਫੇਰ ਆ ਫੇਰ ਤੈਨੂੰ ਮੈਂ ਤੈਨੂੰ ਮੈਂ ਅਟੈਕ ਹੋ ਬਚ ਕੇ ਅਟੈਕ ਹੋਣ ਤੇ ਉਹਨਾਂ ਦੇ ਪੁਆਇੰਟ ਰੁਕਤੇ ਉਹਨਾਂ ਤੇ ਅਟੈਕ ਹੋਏ ਨੇ ਤੇ ਇਹਦੇ ਬੂਤੇ ਮਾਰ ਗਏ ਹੈ ਲੋਦਾ ਗੁਰੂ ਮੂਤ ਦੇ ਕੋਈ ਪੱਕ ਹੋਏ ਫੇਰੀ ਦਾ ਚੱਟਣਾ ਵੀ ਦਿਲ ਤੋਂ ਪਪਨ ਨੂ ਦੂਰ ਦਰਸ਼ਨ ਕਰਾਂ ਤੋ ਪਪਨ ਕੋ ਤੋ ਵੀ ਆ ਵੀ ਇਹ ਨਾ ਕਹ ਜਿਹੜਾ ਫਸਾਉਣ ਨਾਲ ਆ ਵੀ ਫਸਾਉਣ ਨਾਲ ਆ ਵੀ ਫਸਾਉਣ ਨਾਲ ਕੋਸ਼ਿਸ਼ ਹੈ ਹੁੰਦਾ ਆਹਰ ਦਾ ਭਾਵ ਠੀਕ ਹੈ ਜੀ ਸੰਤ ਸਹਾਈ ਨਾਨਕਾ ਵਰਤੈ ਸਭ ਜ਼ਾਹਰ ਸੰਤ ਵਰਤਦਾ ਹੈ ਮਰਗਟੋ ਕੇ ਵਰਤਦਾ ਹੈ ਕੋਈ ਲੋਕ ਵਰਤਦਾ ਸਾਦੇ ਨੰਕੇ ਦੀ ਚੋੜਨਾ ਪ੍ਰਗਟ ਹੈ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਜਵਾਬ ਦੇਣ ਉਹਨਾਂ ਦੇ ਬੰਦੇ ਆਉਂਦੇ ਨੇ ਸੁਣ ਕੇ ਚਲੇ ਜਾਂਦੇ ਨੇ ਜਵਾਬ ਨਾ ਦੇਣੀ ਤੇ ਕਿੱਥੇ ਪਾਏਨ ਹੱਥ ਤਿੰਨੇ ਮਾਰੇ ਨਾਨਕਾ ਜੇ ਕਰਨ ਕਰਣ ਸਮਰੱਥ ਨੇ ਪਹਿਲੇ ਜਦੋਂ ਚੱਲਣਾ ਦਾ ਪਹਿਲਾ ਹੀ ਪੈਰ ਉਲਟਾ ਪਟਲਿਆ ਜਿਹਨੂੰ ਲੇਗੂ ਟੋ ਬੁੱਲੇ ਗੁੱਟ ਤੇ ਕਿੱਥੇ ਪਾਉਣ ਹੱਥ ਕਿੱਥੇ ਪਾਉਣ ਹੱਥ ਉਹ ਹੱਥ ਕੱਦੇ ਪਾਉਂ ਜਿਹਨੂੰ ਗੁੱਟ ਦਾ ਗਿਆਨ ਹੈ ਦੀ ਇਹ ਹੱਥ ਕਿੱਥੇ ਪਾਉਂ ਲੋ ਹੱਥ ਤਾਂ ਉਹ ਕੌਣ ਜਿਹਨੇ ਗੁੱਟ ਦਾ ਦਾ ਗਿਆਨ ਹੈ ਮੁੱਢ ਨਾਲ ਦਾ ਝੁੜ ਕੇ ਮੁੱਢ ਦੇ ਨੇੜੇ ਖੜ ਗਏ ਮੁੱਢ ਦੇ ਉੱਤੇ ਮਾੜਾ ਮੋਟਾ ਪੈਰ ਰੱਖ ਲਿਆ ਗਾਹੋਂ ਤੇ ਆਤ ਪਾਉਂ ਤਾਂ ਗੁੱਡੋਨੀ ਸੱਚ ਨੂੰ ਸੱਚ ਬੋਲਦਾ ਸੱਚ ਨੂੰ ਛੱਡ ਕੇ ਝੂਠ ਨੂੰ ਜੁੜ ਗਏ ਹੱਥ ਪਾ ਲੈਣ ਝੂਠ ਨੂੰ ਤੇ ਫਿਰ ਉਹ ਕਿੱਥੇ ਪਾਉਣ ਮਾਰੇ ਨਾਨਕਾ ਜੇ ਕਰਨ ਕਰਣ ਸਮਰੱਥ ਇਹੇ ਮਾਰੇ ਨੇ ਉਹਨੇ ਪੜਾਏ ਨੇ ਉਹਦੇ ਤੱਕਿਆਂ ਦੇ 16 ਦੇ ਦਰਸ ਕੋ ਖੜੇ ਕਰਤੇ ਮਾਇਆ ਦੇ ਕੋਲ ਵੇ ਸੂਰਨ ਨੂੰ ਅਤਪਾਲੂ ਪਾਲੂ ਜਫਾਉਂ ਪੌੜੀ ਮਹੱਲਾ ਪੰਜਵਾਂ ਇੱਥੇ ਵੈਸੇ ਤਾਂ ਪੌੜੀ 5 ਲਿਖਿਆ ਹੋਇਆ ਉਹਦਾ ਤਾਂ ਕੋਈ ਭਾਵ ਨਹੀਂ ਬਣਦਾ ਹੈ ਜੀ ਮਹੱਲਾ ਪੰਜਵਾਂ ਦੀ ਪੌੜੀ ਹੈ ਇਹ ਮੈਨੂੰ ਲੈ ਫਾਹੀ ਰਾਤੀ ਤੁਰੇ ਪ੍ਰਭ ਜਾਣੈ ਪ੍ਰਾਣੀ ਟੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ ਥਾਹ ਪਾ ਕੇ ਗੜ ਦੇ ਵਿੱਚ ਰਾਤ ਨੂੰ ਤੁਰ ਪਵੇ ਪ੍ਰਾਣੀ ਵੀ ਜਾਣਦਾ ਪ੍ਰਭ ਵੀ ਜਾਣਦਾ ਥਾਹ ਪਾਇਆ ਹੋਇਆ ਗੜ ਚ ਦੇਖੋ ਥਾਹ ਪਾ ਕੇ ਗੜ ਦੇ ਵਿੱਚ ਰਾਤ ਨੂੰ ਤੁਰ ਪਾਇਆ ਹੋਇਆ ਜੀ ਇਹ ਤਾਂ ਜਾਣਦਾ ਜਾਣਦਾ ਮੇਰੇ ਫਾਹ ਪਾਇਆ ਹੋਇਆ ਪ੍ਰਭੂ ਜਾਣਦਾ ਹੈ ਹਾਂਜੀ ਟੱਕੇ ਨਾਰ ਪਰਾਈਆਂ ਲੋਕ ਅੰਦਰ ਤਲਾਸ਼ੀ ਲੈ ਕੇ ਦੇਖਦਾ ਫਿਰਦਾ ਪਰਾਈਆਂ ਬੁੱਤਾ ਰਾਤ ਰੁਕੀ ਕੀ ਕਰਦੀ ਐ ਵੀ ਕੌਣ ਤੱਕ ਕੋਈ ਸਲਾਹ ਕਰਦਾ ਕੋਈ ਖੋਸ ਕਰਦਾ ਕੋਈ ਕੁਸ ਕਰਦਾ ਹੈ ਉਰੋਧਿਤ ਏੜੀ ਲੱਨਾਂ ਫਿਰਦਾ ਪਰਾਈਆਂ ਬੁੱਤਾ ਦੀ ਦੁਜੀਏ ਬੁੱਤਲ ਵੀ ਚੰਨੀ ਦੇਣ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਮਿਲਦਾ ਹੈ ਜੇ ਦੰਦਿਆਂ ਨੂੰ ਮਿੱਠਾ ਜੀ ਬਿਲਦਾ ਤੋਂ ਦੰਦ ਨਹੀਂ ਮਿਲਦਾ ਹੈ ਤੇ ਵਿਖਮ ਥਾਏ ਯਾਦ ਆ ਜਾਂਦਾ ਨਾ ਬਹੁਤਾ ਸਮੋਹਦਾ ਉਹਨਾਂ ਨੂੰ ਨਹੀਂ ਮਿਲਦਾ ਇਤਨ ਤੋ ਘੁੱਟਿਆ ਜਾਂਦਾ ਦਾ ਸਦੀ ਦੇ ਵਿੱਚ ਸੋਨ ਚ ਆ ਜਾਂਦਾ ਜਾਂ ਸਾਡੇ ਚ ਵਿਚਾਲੇ ਆ ਜਾਂਦਾ ਤੋ ਘੜ ਗਿਆ ਜਾਂਦਾ ਜਦ ਉੱਥੇ ਦੀ ਮਿਲਦਾ ਲੋਗ ਉੱਥੇ ਉੱਥੇ ਲੋਗ ਦੀ ਲੋੜ ਪੈਂਦੀ ਹੈ ਜਫਾ ਮਿਲਦਾ ਉਹ ਤਾਂ ਨਹੀਂ ਮਿਲਦਾ ਕਾਲੇ ਨੂੰ ਪਰਵਾਹ ਨਹੀਂ ਇਹ ਬਿਠੇ ਘੱਟੇ ਦੀ ਤਾਂ ਮੰਦਾ ਹੀ ਫਰ ਦੁਆਇ ਤੇ ਦਾ ਲੋਰ ਜਾਣ ਲਿਆ ਜਾਂ ਗਲ ਕੋਟਿਆ ਜੂਂਦਾ ਸਾ ਉਹਨਾਂ ਦੀ ਘਾਰੇ ਦਾ ਜਾਂ ਟੋਟਿਆ ਜਾਂਦਾ ਨਾ ਗਲ ਉਦੋਂ ਗੁਜ਼ਰਿਆ ਵੀ ਮੇਰੇ ਪੁੱਛ ਪਾਦੇ ਹੋ ਚਾਹ ਦੇ ਰੁਬਾਜਨ ਉਦੋਂ ਸੰਨੀ ਹੁੰਦੀ ਹੈ ਜਿਹਦੇ ਚ ਕੋਈ ਚੀਜ਼ ਫੜੀ ਜਾਂਦੀ ਹੈ ਜੀ ਹਾਂ ਜੇ ਚੀਜ਼ ਫੜੀ ਜਾਂਦੀ ਹੈ ਅੱਛਾ ਦਾ ਕੀ ਭਾਵ ਹੁੰਦਾ ਅੱਛਾ ਅਜਬ ਬਖਮਦ ਅੱਲਾ ਹੁੰਦਾ ਬਹੁਤ ਮੁਸ਼ਕਲ ਠੀਕ ਹੈ ਜੀ ਤੇ ਜਦੋਂ ਸੰਨੀ ਦੇ ਵਿੱਚ ਉਹ ਫੜੇ ਜਾਂਦੇ ਆਂ ਮੁਸ਼ਕਲ ਚ ਆ ਜਾਂਦੇ ਨੇ ਅੱਛਾ ਜੀ ਆਪਣੇ ਵਿਕਾਰਾਂ ਕਰਕੇ ਮੁਸ਼ਕਲ ਚ ਆ ਜਾਂਦੇ ਮਿੱਠਾ ਮਦਮਾਣੀ ਸਕਦਾ ਨਾ ਉਹਨਾਂ ਇੱਛਾ ਰੱਖਦੇ ਉਸ ਤੋਂ ਪਹਿਲਾਂ ਨਹੀਂ ਰੱਖਦੇ ਨਾ ਨੋ ਕਾਰਕ ਤੇ ਠੀਕ ਹੈ ਜੀ ਉੱਥੇ ਕਹਿੰਦੇ ਆਪਾਂ ਬੰਦ ਵੀ ਜਾਂਦੇ ਨੇ ਉੱਥੇ ਉਹਨੂੰ ਮਿਲਦਾ ਨਹੀਂ ਠੀਕ ਹੈ ਜੀ ਕਰਮ ਆਪੋ ਆਪਣੀ ਆਪੇ ਪਛਤਾਣੀ ਕਰਮ ਹੀ ਆਪੋ ਆਪਣੀ ਆਪੇ ਪਛਤਾਣੀ ਆਪੇ ਕਰਮ ਕੀਤੇ ਆਪੇ ਪਛਤਾਉਣਾ ਪਊਗਾ ਹੁਣ ਠੀਕ ਹੈ ਜੀ ਅਜ਼ਰਾਇਲ ਫਰੇਸਤਾ ਤਿੱਲ ਪੀੜੇ ਕਹਾਣੀ ਅਜ਼ਰਾਇਲ ਫਰਿਸ਼ਤਾ ਕਹਿੰਦੇ ਨੇ ਉਹ ਕਹਾਣੀ ਦੇ ਵਿੱਚ ਪੇੜ ਦਿੰਦਾ ਜਿਵੇਂ ਤੇਲਾ ਨੂੰ ਤਤ ਬਾਹਰ ਕੱਢ ਲੁੱਦਾ ਹੈ। ਕਹਿੰਦੇ ਨੇ ਇਹਨੂੰ ਪੀੜ ਕੇ ਜੀ ਦੁਹੇ ਚ ਤਤ ਬਾਹਰ ਕੱਢ ਲੰਨ। ਠੀਕ ਹੈ। ਸੰਨੀ ਦੇਖ ਵਿਖਮ ਥਾਏ ਮਿੱਠਾ ਮਦਮਾਣੀ। ਕਰਮੀ ਆਪੋ ਆਪਣੀ ਆਪੇ ਪਛਤਾਨੀ। ਇਹ ਸਮਝਾਓ ਇੱਕ ਵਾਰ ਫੇਰ। ਅਸਰ ਜਿੁੱਡੀ ਜਿਹੜਾ ਹੈ। ਛੁੱਟੀ ਇੱਕ ਤਾਂ ਹੁੰਦਾ ਹੈ। ਛੁੱਟੀ ਚੋਰ ਸਾਡੀ ਜੇਲਾ ਲਾਉਂਦੇ ਆ ਸਾਡੀ ਹੋ ਹੁੰਦਾ। ਉਹ ਹੈ ਜੀ। ਸੱਤੇ ਉੱਪਰ ਚੋਰ ਪੜਿਆ ਗਿਆ ਫਰਜ਼ੀ ਤੱਕ ਐਵੇਂ ਤੇ ਸੱਤੇ ਨਹੀਂ ਹੱਥਾਂ ਦੇ ਵਾਂਗ ਸੱਤੀ ਜਿਹੜੀ ਪਕੜ ਲੈਂਦੀ ਹੈ ਦੋ ਹੱਥਾਂ 'ਚ ਆਪੇ ਨੇ ਇਹਨੂੰ ਕੁੱਟ ਲਿਆ ਇਹਦੇ ਵਿਚਾਰਾਂ ਨੇ ਇਹਨੂੰ ਕੁੱਟ ਲਿਆ ਇਹਦੀ ਇਹਦੀ ਕਾਲੀ ਨੇ ਇਹਨੂੰ ਕੁੱਟ ਲਿਆ ਕੁੱਝਾਂ ਕੁੱਟ ਲਿਆ ਜਾਂ ਪ੍ਰਾਣਾਂ ਨੂੰ ਬੰਦਦੇ ਐ ਇਹਨੂੰ ਪਤਾ ਵੀ ਨਾਮ ਨਾਲ ਜਿਵੇਂ ਪ੍ਰਾਣ ਛੁੱਟ ਜਾਂਦੇ ਨੇ ਕਿਤੇ ਕਿਆ ਨਾ ਚੁੱਟੇ ਪ੍ਰਾਣ ਵਜ ਜਾਂਦੇ ਨੇ ਉਸ ਵੇਲੇ ਨਾਮ ਨਹੀਂ ਮਿਲਦਾ ਨਾਮ ਨਹੀਂ ਮਿਲਦਾ ਸਰੀਰal ਪ੍ਰਾਣਾਂ ਨਾਲ ਜੀਉ ਸਕਦੇ ਜੇ ਦੁੱਖ ਦੇਣਾ ਹੁੰਦਾ ਤਕਲੀਫ ਦੇਣੀ ਹੁੰਦੀ ਆ ਉਹਦਾ ਰਿਜ਼ਲਟ ਤੇ ਨਰੂ ਦਾ ਰਣ ਦੇ ਤੈਨ ਸਤਿਗੁਰੂ ਦਾ ਵਿਰੋਧ ਕਰਨ ਦਾ ਸਜ਼ਾ ਇਹ ਮਿਲ ਗਈ ਗਾਣ ਨੂੰ ਸਤਿਗੁਰੂ ਦੇ ਅੱਗੇ ਆਊਗਾ ਸਤਗੁਰੂ ਜੀ ਆਉਣਾ ਪਿਆਊਗਾ ਸਤਗੁਰੂ ਜੀ ਚੜ੍ਹ ਦੌਰ ਦੀ ਤਕਲੀਫ ਹੈ ਜਿਹੜੀ ਕੀ ਹੈ ਇਹ ਜੁੜੇ ਕਰਕੇ ਫਿਰ ਅਜ਼ਰਾਇਲ ਫਰਿਸ਼ਤਾ ਜਿਹੜਾ ਹੈ ਉਹ ਵੀ ਦੁੱਖ ਦੇ ਦੇ ਉਹ ਦੇ ਰਿਹਾ ਤਿਲ ਪੀਣੇ ਕਾਢੀ ਅਖਰ ਤਿੰਨ ਵਾਰ ਆਉਂਦਾ ਜੀ ਪੂਰੇ ਆਪਣੇ ਬਾਣੀ ਵਿੱਚ ਇਕਤਾ ਇੱਥੇ ਆਉਂਦਾ ਸੰਨੀ ਦੇਨ ਬਖੰਮ ਥਾਈ ਮਿੱਠਾ ਮਦਮਾਣੀ दूसरा ਆਉਂਦਾ ਕੋਲੇ ਪਾਪ ਪੜੇ ਤੇ ਉਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਆਹ ਸਾਡੀ ਚਿੰਤ ਪਈ ਤੀਸਰੀ ਜਗ੍ਹਾ ਇਹ ਆਉਂਦਾ ਨਾਨਕ ਜੰਪੂਰ ਬੱਦੇ ਮਾਰੀਆਂ ਜਿਉ ਸੰਨੀ ਉੱਪਰ ਚੋਰ ਫੰਦੀ ਉਹਦੇ ਸਾਨਾ ਲਾਉਂਦਾ ਸੀ ਚੋਰ ਚੋਰੀ ਕਰਦਾ ਸੀ